दक्षिणे मोहल्ला 5 जे तू वत्तें अंगण हब धरत सुहावी होए इक सकनते बाहरी मैंडी बात ना पुछै कोई जे तू मेरे बेड़े विच आ जावे जे तू मेरे घर हृदय विच आ जावे हृदय विच बस जावे सुंदर ਅਬ ਤਰਸ ਸੁਹਾਵੀ ਹੋਏ ਸਾਰਾ ਹਿਰਦਾ ਮੇਰਾ ਸੁਹਾਵਾ ਹੋ ਜਾ ਸੁਖ ਹੋ ਜਾ ਹਿਰਦੇ ਚ ਮੇਰੇ ਅੰਦਰ ਸੁਖ ਸ਼ਾਂਤੀ ਹੋ ਜਾਵੇ ਇੱਕਦਮ ਤੇ ਬਾਹਰੀ ਬਿਲਡੀ ਬਾਤ ਨੁ ਆ ਕੇ ਮੇਰੇ ਹਿਰਦੇ ਵਿੱਚ ਮੈਨੂੰ ਕੋਈ ਵੀ ਬਾਤ ਪੁੱਛਦਾ ਗਰੀ ਕੋਈ ਕੀਮਤ ਨਹੀਂ ਹੈ ਬਾਹਰ ਕੋਈ ਵੈਲਿਊ ਨਹੀਂ ਹਾਂਜੀ ਹੱਬੇ ਟੋਲ ਸੁਹਾਵਣੇ ਸ਼ਹ ਬੈਠਾ ਆਂਗਣ ਮਲ ਪਹੀਨਾ ਵੰਜੈ ਬਿਰਥੜਾ ਜੋ ਘਰ ਆਵੇ ਚੱਲ ਅੱਬੇ ਢੋਲ ਸੁਹਾਵਣੇ ਸੋ ਬੈਠ ਅੰਗਣ ਵੱਲ ਜਾਨ ਅੰਗਣ ਮੱਲ ਕੇ ਅੰਦਰ ਆ ਕੇ ਆ ਬੈਠ ਗਿਆ ਸਾਰੇ ਗੁਣੇ ਗੁਣ ਉੱਚ ਕੋਟੀ ਦੀਆਂ ਗੱਲਾਂ ਦਾ ਗਿਆਨ ਹੁੰਦਾ ਹੈ ਬਹੁਤ ਪਰਪਦੇ ਪਰਦੇ ਖੁੱਲਦੇ ਨੇ ਜਾ ਆ ਕੇ ਵਹਿੰਦੇ ਉੱਚ ਕੋਟੀ ਦੀਆਂ ਗੱਲਾਂ ਮਤਲਬ ਮਨੁੱਖੀ ਤੋਂ ਪਰੇ ਦੀਆਂ ਗੱਲਾਂ ਪਰਗਟ ਹੁੰਦੀ ਜਾਂਦੇ ਉੱਤੇ ਮਨ ਬੁੱਧੀ ਤੋਂ ਪਰੇ ਦਾ ਗਿਆਨ ਪ੍ਰਗਟ ਹੋ ਰਿਹਾ ਹਾਂਜੀ ਪਹੀਨਾ ਵੰਜੈ ਬਿਰਥੜਾ ਜੋ ਘਰ ਆਵੇ ਚੱਲ ਜਿਹੜਾ ਘਰ ਆ ਜਾਂਦਾ ਚੱਲ ਕੇ ਉਹ ਫਿਰ ਪਹੀਆ ਜਿਹੜੀ ਪਹਿਲੀ ਰਸਤੇ ਦੇ ਨਾ ਪਰੰਪਰਾ ਰਸਤੇ ਮਾਰਗ ਨੂੰ ਨੋਕਲ ਦੇ ਪਈ ਹੁੰਦੀ ਆ ਰਸਤਾ ਤਾਂ ਨਹੀਂ ਠੀਕ ਹੁੰਦਾ ਐਵੇਂ ਬੋੜ ਕੋੜ ਵਾਲਾ ਰਸਤਾ ਬਣਾਇਆ ਉਧਰ ਕੋਈ ਕਹਿੰਦਾ ਸੋੜਾ ਜਿਹਾ ਇਹ ਖਰਾਸਤਾਂ ਹੀ ਚੱਲਣ ਵਾਲਾ ਹੁੰਦਾ। ਉਹ। ਪਈ ਨਾ ਬੰਨਿਆ, ਉਹ ਪਈ ਨਹੀਂ ਜਾਂਦਾ। ਇਹ ਮੋੜ ਕੋਲ ਨਾਲੇ ਰਸਤਾ ਨਹੀਂ ਜਾਂਦਾ ਉਹ, ਕਦੇ ਸੱਚ ਕਦੇ ਝੂਠ ਵੱਲ। ਫਿਰ ਥਲਾ ਜੋ ਘਰ ਆਵੇ ਚੱਲ ਕੇ ਆ ਸਿੱਧਾ ਸਿੱਧਾ ਰਸਤਾ। ਢੇੜ ਰੰਗ ਜਿਹੜਾ ਹਿਲਦੇ ਜਾ ਕੇ ਟਿਕ ਜਾਂਦਾ। ਉਹਦੇ ਸਾਹ ਜਿਹੜੇ ਪਰਬਤ ਭਲੇਖੇ ਦੂਰ ਹੋ ਜਾਂਦੇ ਨੇ, ਕਹਿਣ ਦਾ ਮਤਲਬ ਇਹ ਕਿਸੇ ਪਰਬਤ ਵਿੱਚ ਫਸਿਆ ਨਹੀਂ ਹੁੰਦਾ। ਵਿਰਥੜਾ ਕੀ ਹੁੰਦਾ ਜੀ? ਵਰਥੜਾ ਹੁੰਦਾ ਵਿਅਰਥ। ਵਿਰਥੜਾ ਹੀ ਆ ਭਾਈ। ਕਰਮ ਤਰਮ ਸਾਰੇ ਵਿਰਥੇ ਹੀ ਨੇ। ਵਰਥੇ ਚਲੇ ਜਾਂਦੇ ਜੀ ਵਿਅਰਥ। ਕਿਸੇ ਵਿਅਰਥ ਦੇ ਰਸਤੇ ਅੰਦਰ ਦੀ ਸੋਚੀ ਹੋ ਜਾਂਦੀ ਹੈ ਜਿਹੜਾ ਅੰਦਰ ਟੁੱਟ ਜਾਂਦਾ ਹੈ। ਮਹੱਲਾ ਪੰਜਵਾਂ ਸੇਜ ਵਿਸ਼ਾਈ ਕੰਤਕੂ ਕੀਆ ਇਤੀ ਮੰਝ ਸਮਾਵਣੀ ਜੇ ਗੱਲ ਪਹਿਰਾ ਹਾਰ ਤੇਰੀ ਤੇ ਉਹਦਾ ਪਤੀਵਾਸ ਤੇ ਵਿਚਾਈ ਸੀ ਕਰਤਵਾਸ ਤੇ ਵਿਚਾਈ ਸੀ ਵਿਚਾਈ ਕਰਤ ਕੋ ਕੀਆ ਸਭ ਗੁਣ ਪੈਦਾ ਕੀਤੇ ਸੀ ਹੋਵੇ ਉਹਦੇ ਵਾਸਤੇ ਕੀਤੇ ਸੀ ਖੋਲ ਕੇ ਰੱਖਿਆ ਸੀ ਤੇਰੀ ਵਿਚਾਈ ਦਾ ਮਤਲਬ ਖੁੱਲੀ ਕਿਤਾਬ ਵਾਂਗੂ ਇੱਕ ਹਿਰਦਾ ਕਰਤਾ ਸੀ ਜੋ ਮਨ ਵਿੱਚ ਗੱਲ ਹੈ ਉਹੀ ਬਾਹਰ ਹੈ ਜੋ ਮੂੰਹ ਵਿੱਚ ਆ ਉਹ ਹੀ ਮਨ ਵਿੱਚ ਗੱਲ ਹੈ ਜਿਹੜੀ ਜਦੋਂ ਮੂੰਹ ਦੀ ਗੱਲ ਦੀ ਗੱਲ ਇੱਕ ਹੋ ਜਵੇ ਉਦੋਂ ਹੋਰ ਦੇ ਬੁਰਜ ਹੈ ਮੂੰਹ ਦੇ ਵਿੱਚ ਹੋਰ ਹੈ ਉਹਨਾਂ ਨੇ ਜੋ ਕੁਝ ਲਪੇਟਿਆ ਹੋਇਆ ਹੈ ਵਿੱਚ ਵਾਲਾ ਵਿੱਚ ਕੋਈ ਵਿਸ਼ਾ ਨਹੀਂ ਹੋਇਆ ਖੋਲਿਆ ਨਹੀਂ ਹੋਇਆ ਇਹ ਤਾਂ ਸੱਚਮਾ ਸੇ ਚੇਜ ਮਚਾਈ ਹੈ। ਕੇ ਬੈਠੇ ਸਾਚਾ ਕੇ ਟਿਕੇ ਹਾਂ ਜੀ ਠੀਕ ਹੈ ਜੀ ਇਤੀ ਮੰਜਨਾ ਸਮਾਵਈ ਜੇ ਗੱਲ ਪਹਿਰਾ ਹਾਰ ਜੇ ਮੇਰੇ ਗੁਣਾਂ ਦਾ ਗਲ ਹਾਰ ਹੋਵੇ ਸਾਰਿਆਂ ਦਾ ਇਤੀ ਮੰਜਨਾ ਸਮਾਵਣੀ ਮੇਰਾ ਖਾਤਮਾ ਨਹੀਂ ਹੋ ਸਕਦਾ ਫਿਰ ਮੇਰਾ ਵਜੂਦ ਕਾਇਮ ਰਹੂ ਪਰ ਡੁੱਬ ਨਹੀਂ ਸਕਦੀ ਆਇਆ ਦੇ ਵਿੱਚ ਭਗਵਾਨ ਸਾਹਿਬ ਅਜ ਡੁੱਬ ਨਹੀਂ ਸਕਦੀ ਇਹ ਗੇਸੇ ਜਿਵੇਂ ਵਿਛਾਤੀ ਐ ਉਸ ਤੋਂ ਬਾਅਦ ਜਿਵੇਂ ਗਲ ਚ ਹਾਰ ਪਾਲ ਮਾਂ 8 ਗੁਣਾ ਦਾ ਫੇਰ ਮੈਂ ਇਹ ਮਾਇਆ ਚ ਨਹੀਂ ਡੁੱਬ ਸਕਦੀ ਫਿਰ ਕਿਸੇ ਚੀਜ਼ ਦੇ ਵਿੱਚ ਸਮਾ ਨਹੀਂ ਸਕਦਾ ਮੇਰਾ ਮਾਇਆ ਜਿ ਨਹੀਂ ਸਮਾਉਂਦੀ ਮੈਂ ਜਾ ਕੇ ਲੋਭ ਜਾ ਕੇ ਕ੍ਰੋਧ ਦੇ ਵਿੱਚ ਨਹੀਂ ਸਮਾਉਂਦੀ ਔਗਣਾ ਜਿ ਨਹੀਂ ਸਮੂਦੀ ਔਗਣਾ ਦੇ ਵਿੱਚ ਕੀ ਰਾਬਤਾ ਲੈਂਦਾ ਪਰ ਵੀ ਜਿ ਨਹੀਂ ਜਾ ਕੇ ਇਹ ਹਰ ਹੋਂਦ ਵਾਲ ਦੇ ਵਿੱਚ ਅਲਿਪਤ ਹੋ ਜਾਂਦੀ ਐ ਮਾਇਆ ਤੋਂ 8 ਗੁਣਾ ਦਾ ਹਾਰ ਹੋਵੇ ਆ ਜੀ ਸੱਤ ਗੁਣਾ ਦਾ ਹਾਰ ਹੋਵੇ ਬਲਕੇ 8 ਦੇ ਨਾਲ ਸੱਤ ਗੁਣੇ ਆ ਜਾਂਦੇ ਪਰਮੇਸ਼ਰ ਜੋ ਨਿਨਾ ਆਵਹੀ ਤੂੰ ਹੁਕਮ ਹੀ ਸ੍ਰਿਸ਼ਟ ਸਾਜ ਸਮਾਵਹੀ ਤੂੰ ਪਾਰਬ੍ਰह्म ਪਰਮੇਸ਼ਰ ਤੂੰ ਤਾਂ ਪਾਰਬ੍ਰह्म ਪਰਮੇਸ਼ਰ ਜੋ ਨਾ ਆਵੇ ਤੂੰ ਤਾਂ ਜਲੀ ਆਉਂਦਾ ਅਸੇਨੀ ਜਨਮ ਦਾ ਇੰਦਾ ਬਾਲ ਪਰਮੇਸ਼ਰ ਹੈ ਜਿਹੜਾ ਤੇ ਹੁਕਮ ਹੀ ਸਾਜੀ ਸ੍ਰਿਸ਼ਟ ਜਿਹੜੀ ਸੇਤੀ ਅਧਰੇ ਹੁਕਮ ਨਾਲ ਸਾਜੀ ਹੈ ਸੇਤੀ ਵਿੱਚ ਤੂੰ ਹੁਕਮ ਸਮਾਇਆ ਹੈ ਤੇਰਾ ਸ੍ਰਿਸ਼ਟੀ ਵਿੱਚ ਦਾ ਹੁਕਮ ਸਮਾਇਆ ਹੈ ਤੇਰਾ ਵਿੱਚ ਕੁਦਰਤ ਹਰ ਪ੍ਰਭ ਪ੍ਰਥੇ ਜਿਓ ਕੁਦਰਤ ਦੇ ਵਿੱਚ ਤਾਂ ਕਾਦਰ ਜਰੂਰ ਬਸਦਾ ਪਰ ਸ੍ਰਿਸ਼ਟੀ ਜਿ ਨਹੀਂ ਬਸਦਾ ਆਪਣੀ ਇੱਛਾ ਵਿੱਚ ਤਾਂ ਆਪ ਬਸਦਾ ਜਰੂਰ ਛਾਜ ਵਸਦਾ ਕੋਦ ਵਿਚ ਵਸਦਾ ਸ੍ਰਿਸ਼ਟੀ ਆਇਆ ਤੋਂ ਲਿਪਤੇ ਜੋ ਚਾਹੁੰਦਾ ਉਹ ਹੋ ਜਾਂਦਾ ਤੂੰ ਹੁਕਮੀ ਸਾਜੈ ਸ੍ਰਿਸ਼ਟ ਸਾਜ ਸਮਾਵਹੀ ਵੀ ਹੁਕਮ ਨਾਲ ਠੀਕ ਹੈ ਇੰਨਾ ਜੁੜਿਆ ਵੀ ਰਹਿੰਦਾ ਨਾ ਦੇਖਦਾ ਤਾਂ ਰਹਿੰਦਾ ਸ੍ਰਿਸ਼ਟੀ ਨੂੰ ਲਿਪਤ ਰਹਿਣਾ ਪਰ ਲਿਪਤ ਹੁੰਦਾ ਉਹਦੇ ਵਿੱਚ ਲਿਪਤਰੀ ਹੁੰਦੀ ਠੀਕ ਹੈ ਜੀ ਕਿ ਹੰਤਾ ਰੱਖਦਾ ਆਪਦਾ ਸ੍ਰਿਸ਼ਟੀ ਦਾ ਪਰ ਲਿਪਤ ਨਹੀਂ ਹੁੰਦਾ ਤੇਰਾ ਰੂਪ ਨਾ ਜਾਈ ਲਖਿਆ ਕਿਉ ਤੁਝੈ ਤੇ ਆਵਹੀਂ ਤੇਰਾ ਰੂਪ ਨਾ ਜਾਈ ਲਖਿਆ ਜੇ ਸਾਰੇ ਲੋਕ ਇਹ ਮੰਨਦੇ ਨੇ ਕਿ ਬਸ ਸਦਾ ਤੇਰਾ ਰੂਪ ਜਿਹੜਾ ਵੇਖਿਆ ਨਹੀਂ ਜਾ ਸਕਦਾ ਤੇ ਜਿਹੜੇ ਧਿਆਨ ਧਰਦੇ ਨੇ ਤੇਰੇ ਉਹ ਕਿਵੇਂ ਧਰਦੇ ਪਖੰਡ ਧਰਦੇ ਕਿ ਆਨ ਵੀ ਲਾਈ ਬੈਠਾ ਜੋਗੀ ਰੂਪ ਵੀ ਦੇਖਿਆ ਨਹੀਂ ਕਦੇ ਹੈਗਾ ਦੇਖਿਆ ਜਾ ਨਹੀਂ ਸਕਦਾ ਇਹਦਾ ਮਤਲਬ ਹੈ ਪਖੰਡ ਦੇਖੋ ਕੱਲ ਇਹ ਤੇ ਪਾਰਬ੍ਰਹਮ ਦੀ ਕੀਤੀ ਹੈ ਇਹ ਤਾਂ ਅਕੀਰੂਪ ਦਾ ਦਰਸ਼ਨ ਕਰਨਾ ਉਹ ਆਪਣੇ ਮੂਰਤ ਦਾ ਕਰਨਾ ਸਾਡੇ ਤੇ ਨਹੀਂ ਲੱਗੂ ਹੁੰਦੀ ਇਹ ਗੱਲ ਤੇ ਲੱਗੂ ਹੁੰਦੀ ਦਾ ਧਿਆਨ ਕਰਦੇ ਨੇ ਪਰਮੇਸ਼ਰ ਦਾ ਧਿਆਨ ਤੇ ਨਹੀਂ ਲੱਗੂ ਹੁੰਦੀ ਕਿ ਜਿਹੜੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਧਿਆਉਂਦੇ ਲੱਗੇਗੀ ਜੀ ਉਹ ਤਾਂ ਤਾਂ ਲੱਗੂਗਾ ਉਹ ਤਾਂ ਇਹਨਾਂ ਦੇ ਭਾਈ ਨੇ ਠੀਕ ਹੈ ਜੀ ਤੂੰ ਸਭ ਵਿੱਚ ਵਰਤੈ ਆਪ ਕੁਦਰਤ ਦੇਖਾ ਬਈ ਤੂੰ ਸਭ ਵਿੱਚ ਵਰਤੈ ਆਪ ਕੁਦਰਤ ਦੇਖਾ ਲਈ ਆ ਦੇਖੋ ਤੂੰ ਸਾਰਿਆਂ ਚ ਆ ਤੇ ਵਿੱਚੋਂ ਤੇਰਾ ਪਤਾ ਲੱਗਦਾ ਕੁਦਰਤ ਦਿਖਾਉਂਦੀ ਆ ਸਭ ਕੁਝ ਨਜ਼ਾਰਾ ਕੁਦਰਤ ਦਾ ਜਿਹੜਾ ਨਜ਼ਾਰਾ ਇਹ ਤੇ ਸਮਝ ਆਉਂਦੀ ਆ ਕੁਦਰਤ ਤੇ ਦੱਸਦੀ ਆ ਕਿ ਸਾਰਿਆਂ ਚ ਵੱਸਦਾ ਤੂੰ ਜਿਹੜਾ ਦਰਖਤ ਸੁੱਕ ਜਾਂਦਾ ਉਹ ਤੂੰ ਨਹੀਂ ਹੁੰਦਾ ਪਰ ਜਿੱਥੇ ਦਰਾਖਤ ਸੁੱਕਦਾ ਉੱਥੇ ਜੋਤ ਹੀ ਹੈ ਉੱਥੇ ਹੁਕਮ ਹੈਗਾ ਇਹਦਾ ਹੁਕਮ ਹੈ ਕਿ ਹੋਇਆ ਵੀ ਜੋਤ ਨੂੰ ਨਿਕਲ ਜਾ ਤੂੰ ਹੁਕਮ ਨਹੀਂ ਜੋਤ ਘੰਡੀ ਹੈ ਉਥੋਂ ਤਾਂ ਹੀ ਹੁੰਦੀ ਹੈ ਕਿਸੇ ਇਨਸਾਨ ਦੀ ਹੈ ਜੀ ਆ ਹੁਕਮ ਹੰਦ ਛੱਡ ਜਾ ਭਾਈ ਇਹ ਤੇਰੀ ਭਗਤੀ ਭਰੇ ਪੰਡਾਰ ਟੋਟ ਨਾ ਆਵਹੀ ਇਹ ਰਤਨ ਜਵੇਹਰ ਲਾਲ ਕੀਮ ਨਾ ਪਾਵਹੀ ਜਿਹੜੇ ਹਿਰਦੇ ਵਿੱਚ ਤੇਰੀ ਭਗਤੀ ਦੇ ਪੰਹਾਰ ਭਰੇ ਹੋਏ ਨੇ ਉੱਤੇ ਟੋਟਾ ਹੀ ਨਹੀਂ ਜਿੰਨੂੰ ਮਰਜ਼ੀ ਕਥਨ ਕਰੀ ਜਾਵੇ ਉਹ ਕਥਨ ਕਰ ਲੋ ਟੋਟਾ ਨਹੀਂ ਰਤਨ ਜਵੇਹਿਰ ਲਾਲ ਕੀਮ ਨਾ ਪਾਵਹੀ ਨੇ ਜਿਹੜੇ ਤੇਰੇ ਗੁਣ ਦਾ ਹਨ ਜਿਹੜੇ ਤੇਰੇ ਗੁਣ ਨੇ ਇਹੀ ਰਤਨ ਜਵੇਹਿਰ ਲਾਲ ਇਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਫਿਰ ਇੱਕ ਗੁਣ ਦੀ ਵੀ ਕੀਮਤ ਨਹੀਂ ਪਾਈ ਜਾ ਸਕਦੀ ਜਿਸ ਹੋਵੇਂ ਆਪ ਦਇਾਲ ਤਿਸ ਸਤਗੁਰ ਸੇਵਾ ਲਾਭੀ ਤਿਸ ਜੋ ਹਰ ਗੁਣ ਗਾਵੀ। ਜੇ ਦੋਵੇਂ ਆਪ ਦਇਾਲ ਜਿਹਦੇ ਤੇ ਤੂੰ ਆਪ ਦਇਾਲ ਹੋ ਜਾਵੇਂ ਇਸ ਸਤਗੁਰ ਸੇਵਾ ਲਾਵੇ ਉਹ ਸਤਗੁਰ ਉਹਨੂੰ ਸੇਵਾ ਲਾ ਦਿੰਦਾ ਸਤਗੁਰ ਨਾਮ ਦੇਈ ਜਾਂਦਾ ਉਹ ਗਾਹ ਬੋਲੀ ਜਾਂਦਾ ਦੱਸੀ ਜਾਂਦਾ ਸਤਗੁਰੂ ਬੁਲਾਉਂਦਾ ਸਤਗੁਰੂ ਬੋਲਦਾ ਹੈ ਸਤਿਗੁਰੂ ਦੇ ਹਾਲ ਹੋਇਆ ਤੇ ਸਤਗੁਰ ਸੇਵਾ ਲਾਵੇ ਸਤਗੁਰੂ ਪਹਿਲਾਂ ਆਏ ਗਿਆ ਪਰਮੇਸ਼ਰ ਪਰਮੇਸ਼ਰ ਪਹਿਲਾਂ ਆਏ ਗਿਆ ਹਨਾਪਾਤ ਪ੍ਰਭ ਠੀਕ ਹੈ ਪਰ ਉਹਨੂੰ ਜਿਹਨੂੰ ਜਿਸ ਹੋਂਵੇਂ ਆਪ ਦਿਆਲ ਉਹ ਸਤਗੁਰੂ ਹੈ ਉਹ ਆਪ ਆਪ ਆਪ ਪਰਮੇਸ਼ਰ ਵਾਸਤੇ ਹੀ ਲਾਵੇ ਹਾਂ ਪਰ ਉਹਨੂੰ ਆਪ ਸਤਗੁਰੂ ਵੀ ਕਹਿ ਸਕਦੇ ਆ ਨਾ ਹਾਂ ਸਤਗੁਰੂ ਹੀ ਕਹਾਂ ਠੀਕ ਹੈ ਤੇ ਬੋਲਣ ਵਾਲਾ ਸਤਗੁਰ ਹੈ ਜੋ ਇਕੱਠੇ ਨੇ ਸੇਵਾ ਸਤਗੁਰ ਆਰੇ ਸਾਥ ਜਨਾਬੇ ਜਸ ਗਾਇਓ ਜੋ ਇਕੱਠੇ ਮਿਲ ਕੇ ਗਾ ਸਕਦੇ ਨੇ ਤੇ ਕੋਹੋ ਕੇ ਗਾਇਆ ਜਾਂਦਾ ਠੀਕ ਹੈ ਜੀ ਤਿਸ ਕਦੇ ਨ ਆਵੇ ਹਰ ਗੁਣ ਗਾਵਹੀ ਜਿਹੜਾ ਹਰ ਦਾ ਗਾਇਨ ਕਰਦਾ ਹੈ ਹਜ਼ੀਦੇ ਗੁਣਾਂ ਦਾ ਗਾਇਨ ਕਰਦਾ ਉਹ ਕਦੇ ਟੋਟਾ ਹੁੰਦਾ ਨਹੀਂ ਗੁਣੋਂ ਤੇ ਭੁਖਦਾ ਨਹੀਂ ਟੋਟਾ ਹੁੰਦਾ ਨਹੀਂ ਠੀਕ ਹੈ ਜੀ ਇੱਥੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ ਹਾਂ